ਸ਼ਲੋਕ ਮਹੱਲਾ 5ਵਾਂ ਮਾਇਆ ਮਨੋਂ ਨਾ ਵਿਸਰੈ ਮੰਗੇ ਦਮਾ ਦਮ ਨਾਨਕ ਨਹੀਂ ਕਰਮ ਮਾਇਆ ਮਨੋਂ ਨਾ ਵਿਸਰੈ ਮਾਇਆ ਦੇ ਕਰੇ ਮਨੋਂ ਵਿਸਰੈ ਜੀ ਘੜੀ ਗੁੰਗੇ ਦਮਾ ਦਮ ਮਾਇਆ ਹੀ ਮਾਇਆ ਬੁਝੀ ਜਾਂਦਾ ਦੰਦੂ ਕਹਿੰਦੇ ਪੈਸੇ ਨੂੰ ਪੈਸੇ ਪੈਸਾ ਕਰੀ ਜਾਂਦੇ ਆਪਣੇ ਜਿਹੜਾ ਪ੍ਰਭਾਵ ਅਤਰਾ ਮੂਰਤ ਦਾ ਵਿਚਾਰ ਕਰੇ ਉਹ ਜਿੱਦਾ ਹੀ ਉਹਦਾ ਮੂਰਤਾ ਸਦਾ ਜਾਨ ਦਾ ਨਹੀਂ ਕਰੰਗੋ ਇਹਦਾ ਮਾਇਆ ਕਰਮ ਤੇਰਾ ਠੀਕ ਨਹੀਂ ਹੈ ਤੇਰਾ ਜਿਹੜਾ ਕੰਮ ਆਇਆ ਠੀਕ ਰਹੇਗਾ ਤੇਰੇ ਤੇ ਆਪਣੀ ਕਿਰਪਾ ਹੀ ਈ ਹੈ ਆਪਣੀ ਕੰਮ ਤੇਰਾ ਠੀਕ ਨਹੀਂ ਜਿਹੜੀ ਮਾਇਆ ਦੇ ਰੂਪ ਸਰਤੀ ਆਪਣੇ ਮੂਰਤ ਜਿ ਨਹੀਂ ਰੱਖਦਾ ਦਮਾ ਦਮ ਤੋਂ ਮਤਲਬ ਹਰੇਕ ਦਮ ਨਾਲ ਯਾਰ ਮਾਇਆ ਹੀ ਮਾਇਆ ਦਾ ਮੂਰਤ ਮਾਇਆ ਨੂੰ ਕਹਿਣਾ ਪੈਣਾ ਹੈ ਕਿ ਸਾਥ ਸਾਥ ਮਾਇਆ ਹੀ ਨੂੰ ਲੰਗਦਾ ਹੈ ਸਾਥ ਸਾਥ ਮਾਇਆ ਦੇ ਵੀ ਤੇ ਧਿਆਨ ਲੈਂਦਾ ਹੈ ਅੱਛਾ ਜੀ ਉਹ ਸਾਥ ਸਾਥ ਠੋਣਾ ਸੀ ਨਾ ਠੀਕ ਹੈ ਜੀ ਸੋ ਪਰਪ ਚਿਤਨਾ ਆ ਨਾਨਕ ਨਹੀਂ ਕਰਮ ਵਾਹੀ ਮਾਇਆ ਸਾਥ ਨਾ ਚੱਲਈ ਕਿਆ ਲਪਟਾਵੇ ਅੰਧ ਗੁਰਕੇ ਚਰਨ ਤੇ ਬੰਦ माया ਸਾਥ ਨੇ ਚੱਲ ਰਹੀ ਮਾਇਆ ਦੇ ਨਾਲ ਨਹੀਂ ਜਾਣਾ ਤੇ ਚੱਲਣ ਵਾਲੀ ਚੀਜ਼ ਦੇ ਨਾਲ ਹੈ ਚੱਲ ਬਟਾ ਮੈਂ ਅੰਧ ਉਹ ਤੂੰ ਇਹ ਨੂੰ ਅੰਧ ਹੈ ਅੰਧ ਇਹ ਬੂਰਖ ਅਕਲ ਤੇ ਆਏ ਤੂੰ ਇਹ ਗਿਆਨ ਲੈਣਾ ਨਾ ਗੁਣ ਇਹ ਗੁਣਾਂ ਧਿਆਨ ਕਰ ਗੁਣ ਤੇ ਕਰ ਅੰਦਰ ਆਪਣੇ ਜਿਨਾ ਚੋਂ ਗਿਆਨ ਹੋਵੇ ਤੇਰੇ ਅੰਦਰ ਰੋਜਨੀ ਹੋਵੇ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਜਿਨ੍ਹਾਂ ਚੋ ਗਿਆਨ ਪ੍ਰਾਪਤ ਹੋਣਾ ਗੋਲ ਉਹ ਧਾਰਨ ਆ ਮਾਇਆ ਦੇ ਬੰਨਣ ਆ ਕਰਕੇ ਜਿਹੜੇ ਓਗਣ ਪੈਦਾ ਹੋਏ ਨੇ ਸਾਰੇ ਛੁੜ ਜਾਣਗੇ ਤੇ ਅੰਦਰੋਂ ਇਹ ਗੁਣ ਹੋਣੇ ਓਗਣ ਜਾਂਦ ਕਾਓ ਗਣ ਜੇ ਤੜ ਕੇਸੇ ਗੜੀ ਗੁਣ ਹੋਣ ਤੱਕ ਟੱਟੀਆਂ ਗੁਣਾ ਨਾਲ ਇਹ ਓਗਣ ਸੱਤੇ ਜਾਣਗੇ ਹਾਂਜੀ ਪਾਣੇ ਹੁਕਮ ਮਨਾਇਓਨ ਪਾਣੇ ਸੁਖ ਪਾਇਆ ਪਾਣੇ ਸਤਗੁਰ ਮਿਲਿਓਨ ਪਾਣੇ ਸੱਚ ਧਿਆਇਆ ਜੇ ਗੁਰ ਕੇ ਪਾਣੇ ਚੱਲੇਗਾ ਤੇਰੀ ਇੱਛਾ ਨਾਲ ਤਾਂ ਹੁਕਮ ਬੁਝਿਆ ਜਾਵੇ ਪਾਣੇ ਹੁਕਮ ਮਨਾਇਆ ਨਾ ਤੇਰਾ ਜਿਹੜਾ ਪਾਣਾ ਤੈਨੂੰ ਜੱੰਗਾ ਲੱਗੂ ਜਾਂ ਹੁਕਮ ਮੰਨੇਗਾ ਤੂੰ ਤੇਰੇ ਬਾਣੇ ਨਾਲ ਹੁਕਮ ਮੰਨ ਲੈ ਆਪਣੀ ਇੱਛਾ ਨਾਲ ਜੇ ਤੈਨੂੰ ਚੰਗਾ ਲੱਗਣਾ ਤਾਂ ਹੁਕਮ ਮੰਨ ਲੈ ਜਿੰਨਾ ਤੈਨੂੰ ਹੁਕਮ ਆਪਣਾ ਚੰਗਾ ਲੱਗਦਾ ਜਿੰਨਾ ਚਿਰ ਤੈਨੂੰ ਗੁਰਗਾ ਪਾਣਾ ਜਦ ਤੈਨੂੰ ਗੁਰਗਾ ਪਾਣਾ ਪਾ ਆ ਜਾਣਾ ਫਿਰ ਮੰਨ ਲੈ ਉਹ ਨਾ ਇਹੋ ਜੂ ਪਾਣੇ ਉਹ ਪਾਣੇ ਦੇ ਵਿੱਚ ਸੁੱਖ ਹੈ ਤੇਰਾ ਬਾਣਾ ਜਦੋਂ ਹੋ ਗਿਆ ਨਾ ਗੁਰਬਾਣੀ ਅਨੁਸਾਰ ਚੱਲਣ ਵਾਲਾ ਫਿਰ ਸੁੱਖ ਹੈ ਸੁੱਖ ਹੈ ਗੁਰਦੇ ਪਾਣੀ ਚੱਲਣ ਦਾ ਜਦੋਂ ਤੇਰਾ ਪਾਣਾ ਹੋਵੇ ਤੇਰੀ ਇੱਛਾ ਹੋਵੇ ਜਦ ਇਹ ਪਾਣਾ ਜਦਾਂ ਤੇਰੀ ਜਾਂ ਉਹ ਗੁਰਦੇ ਪਾਣੀ ਚੱਲਣਾ ਦੀ ਉਦੋਂ ਹੋ ਕੇ ਸੋਵੋ ਤਾਂ ਦੇ ਬਾਅਦ ਤੋਂ ਕੋਈ ਨਹੀਂ ਪਾਇਆ ਪਾਣੀ ਦੇ ਨਾਲ ਮਿਲਾ ਕੇ ਤੇਰਾ ਤੇਰੀ ਇੱਛਾ ਲਈ ਤੇ ਸਤਗੁਰਨਾ ਮਿਲ ਆਪਤੰਦ ਪਾਣੀ ਸਾਜ ਤੇ ਆਇਆ ਤੈਨੂੰ ਅੱਛਾ ਲੱਗਣਾ ਸਾਚਿ ਸੇ ਹਾਂ ਜਗਰ ਜਿੰਨਾ ਤਰ ਤਰੂ ਆਇਆ ਬੰਗਣੀ ਅਜੀ ਲੱਗਦੀ ਹੈ ਤੂੰ ਆਇਆ ਹੀ ਬੰਗਦਾ ਹੈ ਨਾ ਤੇਰੀ ਕਿਆ ਹੋਵੀ ਆਪਣੇ ਮੂਲ ਨਾਲ ਜੁੜਨ ਦੀ ਹੁੰਦਾ ਕੋਲ ਦੇ ਨਾਲੇ ਧਿਆਨ ਰੱਖੇਗਾ ਵਰਨਾ ਇਹ ਗੁਰਗਾ ਪਾਣਾ ਜਿਹੜਾ ਹੈਗਾ ਉਹਦੇ ਵਰਗੀ ਤਾਂ ਕੋਈ ਧਾਤ ਹੈ ਨਹੀਂ ਜੇ ਤਦ ਚੰਗਾ ਲੱਗ ਜੂਏ ਕਿ ਤਦ ਉਹ ਗੁਰ ਜਿਵੇਂ ਉਹ ਹੈ ਤੇਰੀ ਮर्जी ਸੱਜ ਆਇਆ ਜਿੰਨਾਂ ਕੋ ਪੂਰਤ ਲਿਖਿਆ ਜਿੰਨ ਸੱਚ ਕਮਾਇਆ ਜਿਨ੍ਹਾਂ ਨੇ ਪੂਰ ਪਹਿਲਾਂ ਮੰਨ ਲਿਆ ਨਾ ਕਿ ਕਮਾਉਣੇ ਸੱਚ ਜਦੋਂ ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਂਦਾ ਫੇਰ ਉਹ ਸੱਚੀ ਕਾਜੀ ਦੀ ਕਮਾਈ ਕਰਦੇ ਨੇ ਬਨੇ ਉਹ ਦਰਦੂ ਦਾ ਇਤਹਾਸਿਕ ਖਬੂਰ ਮਹਾਰਾਜ ਜਿਹਨੂੰ ਲੱਭਦੇ ਹੁੰਦੇ ਨੇ ਜਾਂ ਲੱਭ ਜਾਂਦਾ ਫਿਰ ਕਮਾ ਲੈਂਦੇ ਨੇ ਸਭ ਕੁਝ ਛੱਡ ਦਿੰਦੇ ਨੇ ਜਿਹਨਾਂ ਨੇ ਜੈ ਜੀ ਹੋਇਆ ਉਹ ਚਾਹੇ ਕੋਈ ਤੇ ਇਤਿਹਾਸ ਬਣਾ ਲੈਣ ਕੋਈ ਧਰਮ ਧਾਰਨ ਕਰ ਲੈਣ ਉਹ ਪਖੰਡਵਾਦੀ ਹੋ ਰਹੇ ਨੇ ਜੋ ਲਿਖਿਆ ਤਾਂ ਹੁੰਦਾ ਵੀ ਆ ਧਰਮ ਧਾਰਨ ਕਰਕੇ ਕੁਝ ਡੇਰਾ ਬਣਾਉਣ ਜਿਹੜੇ ਇਹ ਬੰਦੇ ਜਲਦੇ ਤੇ ਉਹਦਾ ਸਬੂਤ ਹੋ ਰਿਹਾ ਕਿ ਜਿਹੜੇ ਉਹ ਸਾਡੇ ਦੀ ਕਮਾਈ ਨਹੀਂ ਕਰਦੇ ਉਹ ਝੂਠੀਓ ਕਰਦੇ ਨੇ ਵਿੱਚ ਜਤੀ ਹਾਂਜੀ ਉਹਦੀ ਛਾੜ ਵਿੱਚ ਤੁਸੀਂ ਜੇ ਜਾਓਗੇ ਉਹਦੀ ਛਾੜ ਵਿੱਚ ਕਰਦੀ ਛੜ ਜੇ ਤੋ ਆਇਆ ਵਿੱਚੀਰ ਦਾ ਜਾਇਆ ਜਾਏਗਾ ਜਗਤ ਉਪਾਇਆ ਜਿਹਨੇ ਜਗਤ ਪੈਦਾ ਕੀਤਾ ਵਿੱਚ ਲੈ ਜਾ ਫੇਰ ਮਾਇਆ ਵੀ ਤਜੂ ਰੋਕ ਰਹਿ ਚੇਰਾ ਰਸਤਾ ਜਿਨਾ ਜਰ ਉਹਦੇ ਹਕਮ ਦੇ ਨਾਲ ਜੁੜਦਾ ਮਾਇਆ ਰਸਤਾ ਰੋਕ ਦੇ ਰੂਗੀ ਜਿਨਾ ਜਰ ਗੁਰਕੇ ਪੰਡੀ ਨਹੀਂ ਜਾਂਦਾ ਜੁੜਦਾ ਮਾਇਆ ਰਸਤਾ ਰੋਕ ਦੇ ਰੂਗੀ ਠੀਕ ਹੈ ਜੀ ਇੱਥੇ 21ਵੀਂ ਪੌੜੀ ਦੀ ਸਮਾਪਤੀ ਹੈ ਜੀ